ਚਲੋਕ ਮਹਲਾ ਪੰਜਵਾਂ ਮੁਹੱਬਤ ਜਿਸ ਖੁਦਾਈ ਦੀ ਰੱਤਾ ਰੰਗੀ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾ ਮੂਲ ਅਜਿਹਾ ਖੁਦਾ ਲੱਗਦਾ ਹੈ ਇਹੋ ਖੁਦਾ ਮੁਸਲਮਾਨੀ ਭਾਸ਼ਾ ਦਾ ਲੱਗਦਾ ਜਿਹਨੂੰ ਅਸੀਂ ਆਪਣਾ ਰੱਬ ਕਹਿੰਦੇ ਆ ਉਹ ਖੁਦਾ ਕਹਿੰਦੇ ਨੇ ਰੱਬ ਕਾ ਨਾਮ ਬੁਖੀ ਰੱਬ ਹਿਆਲੀਏ ਬਾੜ ਕਾ ਨੂੰ ਜਿਸ ਨੂੰ ਬਹੁਤ ਖੁਦਾਈ ਸਦਾਈ ਦੀ mohabbat ਹੈ ਖੁਦ ਦੀ mohabbat ਆਪਣੇ ਨਾਲੇ ਆਪਣੇ ਬੂਲ ਖੁਦਾਈ ਕੀ ਆਪਣਾ ਬੂਲੁੱਦ ਤੋਂ ਖੁਦਾਈ ਬਣੀ ਹੈ ਆਪਣੇ ਬੂਲ ਜਿਹਨ ਆਪਣੇ ਬੂਲ ਨਾਲ ਜਿਹਦੀ mohabbat ਹੈ ਖੁਦਾਈ ਦੀ ਰੱਤਾ ਰੰਗ ਚਲੂਰ ਉਹਨੂੰ ਰੰਗ ਛੜ ਗਿਆ ਪੱਕਾ ਰੰਗ ਚੜ ਗਿਆ ਬਹੁਤ ਗਾੜਾ ਰੰਗ ਚੜ ਗਿਆ ਨਾਮ ਦਾ ਆਨਕਬਲ ਲੈ ਪਾਈਆਂ ਹੈ ਫੰਜੇ ਪਾਸ ਗਣਕ ਜਿ ਬਿਰਲੇ ਨੇ ਐਸਾ ਐਸਾ ਰੰਗ ਜਰੂਰ ਕੀ ਬਣਾ ਉਹ ਵੀ ਫਿਰ ਕੀਮਤ ਬਿਲਕੁਲ ਵੀ ਨਹੀਂ ਪਈ ਆ ਉਹ ਉਹ ਸਾਢੇ ਕਿੰਨੇ ਰਾਜਵੀ ਉਹਦੇ ਵਾਸਤੇ ਪੁੱਛਦੀਆਂ ਉਹਨਾਂ ਸੀਸੀ ਦਾ ਫਿਰ ਹਾਂਜੀ ਇੱਥੇ ਖੁਦਾਇਸ਼ ਜਿਹੜਾ ਸ਼ਬਦ ਹੈ ਇਹ ਗੁਰਮਤਿ ਦੇ ਹਿਸਾਬ ਨਾਲ ਤਾਂ ਹੈ ਆਪਣਾ ਮੂਲ ਹੈ ਜੀ ਹਾਂ ਜੀ ਖੁਦਾਏ ਬਣਿਆ ਹੋਇਆ ਖੁਦਾਈ ਠੀਕ ਹੈ ਜੀ ਜਿਵੇਂ ਮੂਲ ਨੂੰ ਕਹਿੰਦੇ ਆ ਉਸ ਤਰ੍ਹਾਂ ਖੁਦਾਏ ਵੀ ਮੂਲ ਹੀ ਹੈ ਜੀ ਮੂਲ ਨੂੰ ਹੀ ਗੋਬਿੰਦ ਵਣ ਤ੍ਰੇਣ ਤ੍ਰਿਪਵਨ ਰੂਮ ਆਹ ਜਿਹੜੀ ਅਗਲੀ ਹੈ ਸ਼ਲੋਕ ਅਗਲਾ ਇਹ ਉਸੇ ਗੱਲ ਨੂੰ ਉਪੰਦੀ ਨੂੰ ਜਸਟੀਫਾਈ ਕਰਦਾ ਵੀ ਅਸੀਂ ਅਰਥ ਕੀ ਪੀਤੇ ਨੇ ਅੰਦਰ ਆ ਗਿਆ ਨਾ ਅੰਦਰ ਸੱਚ ਨਾ ਗਿਆਨ ਨਾਲ ਜਦ ਵਿੱਤੇ ਗਿਆ ਅਦਰੋਂ ਸੱਚ ਮਿਲ ਗਿਆ ਸੱਚੀ ਜਾਣਕਾਰੀ ਮਿਲ ਗਈ ਇੱਕ ਹੋ ਕੇ ਬਾਹਰ ਵੀ ਸੱਚ ਜਿਥੋਂ ਬਾਹਰ ਵੀ ਦੇਖ ਲਿਆ ਸਾਰਿਆਂ ਦੇ ਵਿੱਚੇ ਘਟ-ਘਟ ਮੈਂ ਅਰਥ ਬਾਹਰ ਦਾ ਮਤਲਬ ਸਾਰਿਆਂ ਦੂਜਿਆਂ ਦੇ ਵਿੱਚ ਹੋ ਆਪਣਿਆਂ ਵਿੱਚ ਆ ਦੂਜਿਆਂ ਦੀ ਕੋਈ ਗੀਜ ਬਾਹਰ ਵੀ ਪਰ ਇਹ ਹੀ ਲਿਆ ਦੇਖ ਰਿਹਾ ਸਾਰਿਆਂ ਦੇ ਇਹ ਕੀ ਚਾ ਜੋ ਮੇਰੇ ਚ ਨਾਂ ਕਰ ਰਵਿਆ ਹੱਬ ਸائیں ਉਹ ਕਹਿੰਦੇ ਸਾਰਿਆਂ ਦੇ ਵਿੱਚ ਰਵਿਆ ਸਾਰੇ ਹਿਰਦਿਆਂ ਚ ਰਵਿਆ ਛੋਟੇ ਤਣਕੇ ਵੀ ਸਾਰਿਆਂ ਜੋ ਹੀ ਹੈ ਬਾਹਰ ਸਾਰੀਆਂ ਜੁਦੀਓ ਜੇ ਕਹ ਲੋ ਕਿੰਨੇ ਪਵੜਾ ਜੋ ਹੀ ਰਮਿਆ ਹਾਂਜੀ ਉਈ ਜੋਤਰਾ ਨਹੀਂ ਹੋਈ ਆ ਰੂਮ ਤੋਂ ਕੀ ਭਾਵ ਹੈ ਜਿੱਤਰੀ ਪਵਣੀ ਰੂਮ ਰਮਿਆ ਹੋਇ ਨੂੰ ਰੋਬੀ ਰਮਿਆ ਹੋਇਆ ਅੱਛਾ ਕਿਉਂਕਿ ਰੂਮ ਦੇ ਅਰਥ ਆਮ ਤਸੀ ਕਰਦੇ ਆ ਕਿ ਸਰੀਰ ਦੇ ਵਿੱਚ ਆਪਣੇ ਉੱਪਰ ਬਾਲ ਹੁੰਦੇ ਬਾਲਾਂ ਵਾਲੀ ਤਾਂ ਕੋਈ ਗੱਲ ਨਹੀਂ ਹੈ ਨਾ ਜੀ ਕਿ ਬਾਲਾਂ ਵਿੱਚ ਰਚਿਆ ਬਾਲਾਂ ਵਾਲੀ ਤਾਂ ਹਿਰਦੇ ਹੁੰਦਾ ਠੀਕ ਹੈ ਹਿਰਦੇ ਚ ਰਚਿਆ ਹੋਇਆ ਹਾਂ ਜੀ ਤਾਂ ਜਦੋਂ ਕਹਿੰਦੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਉਹ ਆਪਣੇ ਤੋਂ ਤੇ ਹੁੰਦਾ ਜੀ। ਉਹਦੇ ਅੰਦਰ ਹੋਰ ਕੋਈ ਖਿਆਲ ਉੱਠਦਾ ਹੀ ਨਹੀਂ। ਪਰ ਹਿਰਦੇ ਦੀ ਉਹ ਗੱਲ ਹੈ ਨਾ ਗੁਰਮੁਖ ਰੋਮ ਰੋਮ ਹਰ ਤੇ ਆਵੇ। ਹਾਂਜੀ ਹਾਂਜੀ ਰੋਮ ਰੋਮ ਮੈਂ ਇਹ ਵੀ ਹਿਰਦੇ ਦੀ ਗੱਲ ਹੈ ਜੀ। ਉਹ ਫਿਰ ਉਹਨਾਂ ਨਾ ਰੋ ਪੂੜ ਬਾਹਲੇ ਗਾਲ ਕਿੱਥੇ ਬਸਦਾ। ਠੀਕ ਹੈ ਜੀ। ਮੁੰਜਾ ਰੋਮ ਰੂਮ ਰੂਮ ਮੇਂ ਬਸੇ ਮੁਰਾਰ ਦਾ ਭਾਵ ਹੈ ਵੀ ਹਿਰਦੇ ਹਿਰਦੇ ਵਿੱਚ ਬਸ ਰਿਆ ਮੁਰਾਰ ਹੈ ਜੀ। ਪ੍ਰੀਤ ਹੈ ਰੌਂਗ ਵਰਗੀ ਪ੍ਰੀਤ ਜਿਵੇਂ ਜਿਵੇਂ ਪਾਣੀ ਹੈ। ਦੁੱਧ ਹੋਏ। ਇਸ ਪਾਣੀ ਜਾਂਦਾ। ਅੱਛਾ ਜੀ ਇੱਕ ਹੋਇਆ ਹੋਇਆ ਪਰ ਉਹ ਹੈ ਹਿਰਦੇ ਦੇ ਵਿੱਚ। ਉਹ ਸਤੱਲਵੰਡ ਵੀ ਹੈਗੇ ਨੇ ਇੱਕ ਬ੍ਰੇਕਅਪ ਵਿਕਲਾਸ ਦਾ ਜਿਹੜਾ ਨਾ ਪਰ ਅੰਦਰ ਨਹੀਂ ਹੁੜ ਰਿਹਾ ਫਿਰ ਤਰਸਬਾਬਤ ਹੋ ਗਿਆ ਅੱਛਾ ਜੀ ਐਸ ਤਰ੍ਹਾਂ ਇੱਕ ਹੋਰ ਆਉਂਦਾ ਰੋਮੇ ਰੋਮ ਰੋਮ ਗੁਰਮੁਖ ਨਾਮ ਧਿਆਏ RAM ਇੱਕ ਦੂਏ ਦੇ ਵਿੱਚ ਤੁਮਾ ਕਬੀਰ ਕਹਿੰਦਾ ਸਕੀ ਪੀਵੇ ਜੀ ਪਸੇ ਜੀ ਮੇ ਪਸੇ ਇੱਕ ਪੀਓ ਜਿਹੜਾ ਜੀ ਸੀ ਪਰ ਪੀ ਸੀ ਜਾਂ ਦੋ ਸੀ ਐਸ ਵਕਤ ਇੱਕ ਹੈ ਹੁਣ ਦੱਸ ਵੀ ਜੀ ਪੀ ਦੇ ਵਿੱਚ ਵਸਦਾ ਕਿ ਪੀ ਜੀ ਦੇ ਵਿੱਚ ਵਸਦਾ ਜਦ ਆਇਆ ਜੀ ਉਹ ਪੀ ਉਹ ਸੁਝੇ ਰਹੇ ਹੁਣ ਨਹੀਂ ਪਤਾ ਕਿਹੜੇ ਜਲੇ ਵਿੱਚ ਵਸਦਾ ਇੱਕ ਦੂਜੇ ਰੋਮ ਰੋਮ ਵਿੱਚ ਜੀ ਉਹ ਪੀ ਉਹ ਘੱਟ ਵਿੱਚ ਜੀ ਉਹ ਪੀਓ ਹੁਣ ਤੇ ਹਰੇਕ ਰੋਮ ਦਾ ਭਾਵੇਂ ਇਹ ਨਹੀਂ ਹੈ ਕਿ ਇਹ ਕਿਸੇ ਬਾਹਰ ਜਿਹੜੇ ਵਾਲ ਹੈ ਉਹਨਾਂ ਵਿੱਚ ਬਾਹਰ ਤਾਂ ਸਰੀਰ ਜੜ ਹੈ ਜੀ ਆਹ ਇਹ ਤਾਂ ਮਾਇਆ ਦਾ ਜੜ ਹੈ ਠੀਕ ਹੈ ਜੀ ਫੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁਪੱਤਿਆ ਆਪੇ ਕੀਤੋ ਰਚਨ ਭਾਇਆ ਦਾ ਵੀ ਪਹਿਲਾਂ ਆਪ ਸੀਗਾ ਆਪੇ ਹੀ ਰਤਿਆ ਉਹ ਨਾਮ ਆਪੇ ਚੜਲਿਆ ਪਹਿਲਾਂ ਲੋਭ ਦਾ ਰੰਗ ਛਾੜਿਆ ਸੀ ਕਿਹਦਾ ਰਤਿਆ ਸੀ ਭਾਇਆ ਚ ਭਾਇਆ ਦਾ ਪਾ ਲੱਗਿਆ ਸਾਲ ਨੂੰ ਆਇਆ ਪਾਹਿਆ ਪਿਆਰੇ ਲੀਤੜਾ ਲੱਭ ਰਹਾਏ ਰੰਗ ਆਪੇ ਹੀ ਰਤਿਆ ਦਾ ਰੰਗ ਵੀ ਆਪੇ ਚਾੜ ਲਿਆ ਉਹ ਛੱਡ ਦਿੱਤਾ ਜਾ ਮਾਇਆ ਦਾ ਪਾਲ ਹੈ ਗਿਆ ਮਾਇਆ ਦਾ ਉਹ ਦੂਰ ਹੋ ਗਿਆ ਜਿੱਥੇ ਰੰਗ ਦਾ ਰੰਗ ਚੜ ਗਿਆ ਆਪਣੇ ਬੂਲ ਬੂਲ ਹੋ ਗਿਆ ਬੂਲ ਡੋ ਚੜ ਗਿਆ ਜਿਹੜੇ ਮੇਰਾ ਚੋੜਾ ਆਪੇ ਹੋਇਓ ਇੱਕ ਆਪ ਕੋ ਪੱਤਿਆ ਆਪੇ ਹੀ ਹੋਇਆ ਆਪੇ ਹੀ ਪੱਤਿਆ ਜਾਂ ਢਾਲ ਹੋਇਆ ਸੀ ਆਪੇ ਬੋਧੀ ਜੂੜੇ ਜੁਗਤਿਆ ਜਿੱਦਿਆਂ ਜੂੜਾ ਨੇ ਬਹੁ ਭਾਰਤੀ ਵੀ ਆਪੇ ਸੀ ਇਹ ਇੱਕੇ ਸੀ ਭਾਰਤੀਆਂ ਦੇ ਵਿੱਚ ਜਰੂਰ ਹੈ ਬਹੁ ਜੁੜਦਾ ਹੈ ਪਰ ਹੁੱਡਾ ਇੱਕੋ ਆ ਪਰ ਹੁੱਡਾ ਦੋ ਤੁੰਗਾਂ ਯਾਰ ਇੱਕ ਤਾਂ ਉਹਦਾ ਫਿਰ ਬਾਹਰ ਹੋਣਾ ਨਾਮਾਇਆ ਸੀ ਹਾਂ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਸਭਨਾ ਵਿੱਚ ਆਪੇ ਸਭਨਾ ਦੇ ਵਿੱਚ ਆਪੇ ਬਾਹਰਾ ਜਦ ਬਾਹਰ ਹੁੰਦਾ ਜਦ ਵੀ ਆਪੇ ਸਰੀਰ ਤੇ ਜੇ ਦਾ ਰੰਗ ਰਵੇ ਸਰੀਰ ਦੀ ਗੱਲ ਸਭਨਾ ਜਿਹੜੀ ਵਿਦੇਹੀਆਂ ਦੇ ਵਿੱਚ ਵੀ ਉਹੀ ਜੋਤ ਹੈ ਵਿਦੇਹੀਆਂ ਛੱਡਣ ਤਾਂ ਜੋਤ ਉਹੀ ਰਹਿੰਦੀ ਹੈ ਆਪੇ ਬਾਹਰਾ ਜਿਹੜਾ ਬਾਹਰ ਹੈ ਸੱਜ ਖੰਡ ਵਿੱਚ ਉਹ ਮਾਇਆ ਤੋਂ ਬਾਹਰ ਹੈ ਵਾਰੀ ਹੋਈ ਹੈ ਆਪ ਸਭ ਨੂੰ ਵਿੱਚ ਜੂਨੀਆ ਜੂਈ ਹੋਈ ਹੈ ਆਪੇ ਜਾਣੇ ਦੂਰ ਆਪੇ ਹੀ ਜਾਰ ਆਪੇ ਦੂਰ ਜਾਣ ਲੰਨਾ ਮੈਂ ਦੂਰ ਹਾਂ ਪਤਾ ਨਹੀਂ ਤੇਰਾ ਬੂੜ ਕਿੱਥੇ ਮੇਰੇ ਨੂੰ ਆਪੇ ਆਪ ਬਣ ਕੇ ਹੋ ਕੇ ਖੜ ਜਾਂਦਾ ਫਿਰ ਕੋਈ ਮੁੜ ਕੇ ਤੂੰ ਪਿਆ ਜਾ ਕੋ ਔਰ ਆਪਣ ਆਪ ਜाहिर ਕੀਤਾ ਆਪੇ ਜाहरा ਜਹਰ ਆਪੇ ਹੋਇਆ ਵੀ ਮੇਰੇ ਨੂੰ ਕੁਕਰੀਸ਼ਰ ਵੀ ਇਹੀ ਕਹਿੰਦਾ ਨੂੰ ਤੇ ਜਨ ਕਹਿੰਦਾ ਪਰ ਤੂੰ ਕਹਿ ਕੇ ਗੱਲ ਬੜਦੀ ਹੈ ਮੈਂ ਕਹਿ ਕੇ ਦੀ ਮੈਂ तू करके तू तू करता तू पेआ ईटा बैर ऊपर दान बनाउंदी है गुरबाणे तू नु प्रदान बनाउंदी है मेरा तू धार है मैं पैदा होई तो मैं छड़ तू रह गया तू तू करता तू पेआ बुज में रहलो हूं एक कोया जा सकता जीए जीए, है तू कह तू गजे मैं मर जाए जब मैं फेर धार है आपे आप होवे गुप्त आपे आप प्रगति तेरी ठट्टी ਆਪੇ ਹੋਣਾ ਗੁਪਤ ਆਪੇ ਗੁਪਤ ਹੋ ਜਾਂਦਾ ਹੈ ਗੁਪਤ ਕਰਨ ਹੋ ਜਾਂਦਾ ਹੈ ਜਦੋਂ ਜਦੋਂ ਇੱਛਾ ਹੀ ਨਹੀਂ ਪੈਦਾ ਹੁੰਦੀ ਗੁਪਤ ਹੋ ਗਿਆ ਹੁਣ ਪ੍ਰਗਟ ਆਇਆ ਰੂਪ ਦੇ ਵਿੱਚ ਗੁਪਤ ਹੋ ਜਾਂਦਾ ਜਾਂ ਤ੍ਰਿਸ਼ੀ ਗੁਪਤ ਹੋ ਜਾਂਦਾ ਚੁੱਪ ਹੋ ਜਾਂਦਾ ਮਨ ਚੁੱਪ ਹੋ ਕੇ ਗੁਪਤ ਹੋ ਸਕਦਾ ਇਹ ਮਨ ਸੁਣਨ ਨਾਲ ਲੁਕ ਹੋ ਕੇ ਲੁਕਿਆ ਜਾ ਸਕਦਾ ਹੈ ਤੋਂ ਆਪੇ ਪ੍ਰਗਟ ਹੋ ਜਾਂਦਾ ਆਪ ਗੁਪਤ ਹੋ ਜਾਂਦਾ ਜਦੋਂ ਇੱਛਾ ਪੈਦਾ ਹੋਈ ਪ੍ਰਗਟ ਹੋ ਗਿਆ ਜਦੋਂ ਇੱਛਾ ਛੱਡਤੀ ਤਾਂ ਗੁਪਤ ਹੋ ਗਿਆ मुक्त प्रकट होए वैष्णव रोग राखल पाओ सो जी कीमत किसे ना पाए तेरी ठट्टी है तेरी कीमत ने कोई पा सकता सुग्रीव आदमी तू ही जाने तू भाई उससे तक्ते होवे तेरी ठट्टी है तो की पर बनजंदा जी सकान टिक जाना फेर दी कीमत पर इते आदी की बदरी पहली है फिर ता खरीद लिया फिर नौकरी भी रखी जाती है फिर ता फिर कीमत पे जाती ਅਬ ਉਹਦੇ ਤੇ ਆੜੀ ਜਦੋਂ ਉਹ ਵੀ ਕੀਪਟੇ ਕੌਮ ਤਨਖਾਹ ਮਾਇਆ ਨਾਲ ਜੁੜੇ ਹੋਏ ਜੀ ਆਇਆ ਤੇ ਫੜਿਆ ਹੋ ਗਿਆ ਫਿਰ ਕੀ ਬਦਲੀ ਕੋਈ ਆਇਆ ਤੇ ਕਾਗੀ ਵੀ ਕੋਈ ਆਇਆ ਧਾਰੀ ਦੀ ਕੀਪਟੇ ਹੈ ਠੀਕ ਹੈ ਜੀ ਗਹਿਰ ਗੰਭੀਰ ਥਾ ਵਪਾਰ ਗੰਤ ਤੂੰ ਨਾਨਕ ਵਰਤਾਇ ਇੱਕ ਇੱਕੋ ਇੱਕ ਤੂੰ ਗਾਇਰ ਗਬੀਰ ਅਧਾ ਤੂੰ ਗਾਇਰ ਗਬੀਰ ਤੇਰੀ ਗਹਿਰਾਈ ਦਾ ਨਹੀਂ ਪਤਾ ਤੇਰੀ ਗੰਭੀਰਤਾ ਦੀ ਗਹਿਰਾਈ ਦਾ ਨਹੀਂ ਪਤਾ ਇੰਨਾ ਤਬੀਰ ਪਤਾ ਤੇਰਾ ਕਿਸੇ ਨੇ ਠਾ ਨਹੀਂ ਪਾਈ ਤੇ ਗਾਇਰ ਗਬੀਰ ਹੋ ਜਾਣਾ ਤੇ ਤੇਰੀ ਥਾ ਨਹੀਂ ਲੱਭਦੀ ਅਪਾਰ ਅਗਣਥ ਤੂੰ ਬਿੜਤੀ ਬਿੜਤੀ ਤੋਂ ਪਰੇ ਹੀ ਨੇ ਨਹੀਂ ਤਾਂ ਸਰਦਾਰ ਕੋਈ ਤੇਰੀ ਤੇਰੀ ਗਹਿਰਾਈ ਨਾਨਕ ਵਰਤਾਇ ਇੱਕ ਜਦ ਇੱਕ ਹੋ ਕੇ ਵਰਸਦਾ ਨਾ ਕੋ ਇੱਕ ਤੂੰ ਕੋਈ ਕੋਈ ਕੰਨ ਤੇਰੀ ਦੁਆ ਹੈ ਜੈ ਕੋ ਬਰਸਨਾ ਭਈ ਕੋਈ ਬਤੂ ਹੀ ਰਹਿ ਜਾਣਾ ਤੇਰੀ ਕੋਈ ਬਸਾਲ ਨਹੀਂ ਹੈ ਤੇ ਤੇਰਾ ਬਦਲ ਨਹੀਂ ਕੋਈ ਹੈ ਤੇ ਕੋਈ ਇੱਥੇ ਦੁਨੀਆਂ ਦੇ ਵਿੱਚ ਐਸੀ ਚੀਜ਼ ਨਹੀਂ ਜਿਹੜਾ ਤੈਨੂੰ ਪ੍ਰਮਾਣਿਤ ਕਰ ਸਕੀਏ ਜੈਸਾ ਤੂੰ ਤੈਸਾ ਤੂੰ ਹੀ ਤੇ ਜੈਸਾ ਫਿਰ ਤੂੰ ਤੈਸਾ ਤੂੰ ਕੋ ਇੱਕ ਤੂੰ ਹੀ ਇਹ ਕੇ ਚੁੱਪੇ ਕੀਤਾ ਜਾ ਸਕਦਾ ਸਾਰਜ ਵੀ ਕੋ ਕੇ ਵਰਤਨ ਜਾਦੇ ਮਾਇਆ ਛੱਡ ਦੇਣੇ ਕੋ ਕੇ ਵਰਤਨ ਤੇ ਤੇਰੇ ਵਰਗਾ ਕੋਈ ਨਹੀਂ ਜੈਸਾ ਤੂੰ ਤੈਸਾ ਤੁਸੀਂ ਫੇਰ ਕੌਣ ਕੀ ਬੁਧਾਵੇ ਤੇ ਫੇਰ ਕੋਈ ਪ੍ਰਮਾਣ ਵੀ ਨਹੀਂ ਦਿੱਤਾ ਜਾ ਸਕਦਾ ਇਹ ಅಮੂਲ ਕਿਹਾ ਜਿਹੜਾ ਇੱਕ ਹੋਇਆ ਚਾਹੇ ਉਹ ਉਗਿਆਵਲੀ ਹੈ ਤੇ ਜੈਸਾ ਤੂੰ ਤੈਸਾ ਤੁਸੀਂ ਕਾਹੇ ਉਹ ਗਿਆਵਲੀ ਉਹ ਜੋਰ ਤਾਂ ਦਾ ਪ੍ਰਮਾਣ ਤਾਂ ਨਹੀਂ ਦਿੱਤਾ ਅਜੀਬਾ ਦੀ ਦਾੜ ਹੈ ਸਰ ਠੀਕ ਹੈ ਜੀ ਇੱਥੇ 22ਵੀਂ ਪੌੜੀ ਦੀ ਸਮਾਪਤੀ ਹੈ ਜੀ ਤੇ ਨਾਲੇ RAMKALI ਕੀ ਵਾਰ ਮਹਾਨਲਾ ਪੰਜਵਾਂ ਇਹਦੀ ਸਮਾਪਤੀ ਹੈ ਇੱਥੇ 22 1 2 ਲਿਖਿਆ ਜੀ ਕਿ 22 ਦਾ ਭਾਵ ਹੈ ਕਿ 22 ਪੌੜੀਆਂ ਇਸ ਵਾਰ ਵਿੱਚ 1 ਦਾ ਭਾਵ ਹੈ ਇਹ ਆਪਣੀ ਵਾਰ ਤੇ ਪਿਛਲੀ ਵਾਰ ਇਹ ਵਾਰ ਦੀ ਮਿਲਾ ਕੇ ਗਿਣਤੀ 2 ਹੋ ਜਾਂਦੀ ਹੈ ਜੀ ਚਾਂਦੂਆਂ ਨੂੰ ਬਰੇੜਾ ਦੋ ਵਾਰ ਹੋਗੀ ਦੋ ਵਾਰਾਂ ਹੋਗੀ ਦੋ ਵਾਰਾਂ ਹੋ ਗਈ RAMKALI ਰਾਗ ਜਿਸ ਤੋਂ ਅੱਗੇ ਫਿਰ ਆਉਂਦੀ ਹੈ ਜੀ RAMKALI ਕੀ ਵਾਰ ਸੱਤੇ ਬਲਵੰਡ ਵਾਲੀ ਸੱਤੇ ਬਲਵੰਡ ਵਾਲੀ ਇਸ ਤੋਂ ਅਗਲੀ ਵਾਰ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਚਾਰੇ ਜਾਗੇ ਚੋਹ ਜੁਗੀ ਪੰਚਾਇਣ ਆਪੇ ਹੋਇਆ 8 1 ਹੈ ਇਹਦੀ ਗਿਣਤੀ ਤਿੰਨ ਨਹੀਂ ਪਾਈ ਉਹ ਨਾਨਕ ਜੋ ਵਰਤਿਆ ਹੋਇਆ ਉੱਥੇ ਦੋਨ ਜੀ ਉਹ ਨਾਨਕ ਪਦ ਵਰਤਿਆ ਹੋਇਆ ਹੈ ਨਾ ਕੋਈ